के लोक पहला पोल तण मन बसै एकै पादर हीड अत् दापण दुख कणो कीने ठाव क्रीड ओले पाछ ते निउरउ घेर कर दे भाजे दा रखे जतराई जे छत्र बणया रहे फेले पै बसता बनके फेर ओगलोडी बल फेदी भाटे दा ਇਹ ਗੁਰਬਾਣੀ ਦੀ ਭੈੜੀ ਨੂੰ ਤਾਂ ਇਹ ਹਾਂਜੀ ਦਿਖਦਾ ਐ ਕਦ ਮਰਦੀ ਐ ਜੇ ਘੋੜਾ ਹੋ ਜੇ ਗੁਰਬਾਣੀ ਨੂੰ ਸਾਥੀ ਮੰਨ ਲਵੇ ਚਿਤਰਾਈ ਤੇ ਆਦਤ ਬੋ ਉਹ ਤਾਂ ਹਰ ਤੇ ਦੂਆ ਖਿਆਲ ਪਹਿਦਾ ਨਹੀਂ ਹੁੰਦਾ ਅੰਦਰ ਦੂਆ ਗਿਆਨ ਦਾ ਚਿਤਰਾਈ ਪਹਿਦਾ ਕਰਦੀ ਐ ਆਪਣੀ ਜਿਹੜੀ ਹੈ ਨਾ ਅਗਰ ਉਹ ਪੈਦਾ ਕਰਦੀ ਆ ਤਾਂ ਤਾਂ ਆਪਾਂ ਦੁੱਖਣੂ ਆ ਜਿਹੜਾ ਬਨੇ ਕਾ ਆਸਾ ਆਸਾ ਨੇ ਇੱਕ ਪਿਆ ਤੇ ਸਲਾਹਾਂ ਕਾ ਹਕੀ ਬਣ ਗਈ ਆ ਆਪਾਂ ਦੁੱਖ ਕਰਵੇਂ ਜੀ ਦੁੱਖੇ ਦੁੱਖੇ ਇਹਨਾਂ ਖਾਵ ਧੀੜ ਇਹ ਇਹ ਰਹ ਜੋ ਮਾਇਆ ਦੇ ਗੁਜ਼ਾਰ ਰਹਿੰਦਾ ਤੇ ਦੁਆਪਰ ਤ੍ਰੇਤਾ ਕਾਲ ਦੁਆਪਰ ਤ੍ਰੇਤਾ ਕਾਲ ਦਨੇ ਜਾਂਦਾ ਕਦੇ ਖਾਲੀ ਹੈ ਕਦੇ ਭਰਿਆ ਹੋਇਆ ਉਹਦੇ ਤੇ ਪਸਰ ਤੇ ਉੱਤੇ ਨਾ ਜਾਂਦਾ ਅੱਗੇ ਲੀ ਜਾਂਦਾ ਤੇ ਜਿਹੜਾ ਆ ਹੀ ਜਾਂਦਾ ਹੋਜੀ ਮਹੱਲਾ ਪਹਿਲਾ ਮੰਡਲ ਵੇਦ ਤੇ ਬਾਜਣੋ ਘਣੋ ਧੜੀਏ ਜੋਏ ਨਾਮ ਸਮਾਲ ਬੀਜੋ ਅਵਰ ਨਾ ਕੋਈ ਆਹਨੋ ਨਾ ਕੋ ਹੁਣ ਵੇਦ ਗਿਆਨ ਦੇ ਬਾਜਾ ਦੇ ਅੰਦਰ ਸ਼ਬਦ ਦਾ ਤੋਲ ਬਗਿਆ ਹੈ ਅੰਦਰ ਸ਼ਬਦ ਪ੍ਰਗਟ ਹੋਇਆ ਅੰਦਰ ਕੁਝ ਗਿਆਨ ਪੈਦਾ ਹੋਇਆ ਪੜਾੜਿਆ ਜੋਈ ਇਹ ਹੀ ਇਹ ਬਾਜਪਵੇ ਇਹ ਫਿਰ ਥੋੜਾ ਜਿਹਾ ਵੀ ਬਾਜਪਵੇ ਵੱਧ ਸਕਦਾ ਵਧਾਇਆ ਜਾ ਸਕਦਾ ਰਾਣੀ ਤਾਂ ਜਿਹਾ ਕਰਦਾ ਇੱਕ ਵਾਰ ਆਵਾਜ਼ ਥੋੜੀ ਜਿਹੀ ਆਉਣ ਲੱਗੇ ਜੇ ਤਾਂ ਬਤਾਈ ਜਾ ਸਕਦੀ ਆ ਆਵਾਜ਼ ਧਿਆਨ ਲੈਂਦਾ ਗਿਆਨ ਹੋਰ ਲੈਂਦਾ ਵਿੱਚੋਂ ਕੋਈ ਤੂੰ ਦੀਜਿਆ ਵੀ ਤਾਂ ਜਿਆਦਾ ਜੇ ਤੂੰ ਕੁਛ ਨਹੀਂ ਹੈ ਆਵਾਜ਼ ਨਾਲ ਕਹਿਣ ਲੱਗ ਜਾ ਬੇਚੋਣੇ ਜੇ ਤੈਨੂੰ ਸੁਣੂਗਾ ਫੁਰਤੀ ਬਾਣੀ ਜਦੋਂ ਬੀਜ ਤੇ ਸੋਜੀ ਪੜੀ ਅੰਦਰੋਂ ਹੀ ਸੋਜੀ ਆਉਂਦੀ ਹੈ ਅੰਦਰੋਂ ਹੀ ਸੋਜੀ ਆਉਂਦੀ ਹੈ ਆਵਾਜ਼ ਪੈਪਰ ਚੋ ਜਾਣਾ ਜੀਵ ਬੀਜ ਤੋਂ ਬਾਦ ਹੋਰ ਕੁਝ ਨਹੀਂ ਫਿਰ ਇੱਕ ਬਣਦਾ ਇੱਕ ਬੀਜ ਹੋ ਜਾਂਦਾ ਫਿਰ ਬਾਥੇ ਉੱਗਦਾ ਫੱਟੇ ਫੱਟ ਬੀਜਿਆ ਨਾ ਫਿਰ ਮੰਦਲ ਬੀਜ ਤੇ ਵਾਜਣੋ ਘਣੋ ਧੜੀਐ ਜੋਇ ਕਹਿੰਦਾ ਭਾਬਾ ਵੀ ਜਿਹੜਾ ਮੰਨਦਲ ਹੈਗਾ 베ਦ ਵਾਲਾ ਉਹ ਜੇ ਵੱਜਣ ਲੱਗ ਗਿਆ ਵਾਜਣੋ ਘਣੋ ਉਹਨੂੰ ਵਧਾਇਆ ਜਾ ਸਕਦਾ ਹੈ ਜੀ ਹਾਂ ਤਾਂ ਸਹੀ ਫਿਰ ਤਾਂ ਉਹ ਵੱਜੀ ਜਾਂਦਾ ਧੜੀਐ ਜੋਇ ਕੀ ਭਾਬਨ ਦਾ ਮੰਨਦਲ 베ਦ ਤੇ ਵਾਜਣੋ ਘਣੋ ਧੜੀਐ ਜੋਇ ਇੱਕ ਪਾਸੇ ਤਾਂ ਵੱਜਦਾ ਹੁੰਦਾ ਜੋ ਪਾਸੇ ਤੇ ਨਹੀਂ ਵੱਜਦਾ ਵਾਂਦਰ ਜਿਵੇਂ ਨਜ਼ਾਰਾ ਇੱਕ ਪਾਸੇ ਤਾਂ ਹੀ ਵੱਜਦਾ ਅੱਛਾ ਜੀ ਜੋ ਪਾਸੇ ਤੇ ਅੱਛਾ ਜੀ ਇੱਕੋ ਸਾਈਡ ਹੁੰਦੀ ਹੈ ਦੋ ਸਾਈਡਾਂ ਹੁੰਦੀਆਂ ਹੀ ਦੀ ਉਹਦੀਆਂ ਅੱਛਾ ਢੜੀ ਦਾ ਮਤਲਬ ਕਿ ਇੱਕੇ ਪਾਸੇ ਢੜਾ ਰੱਖੇ ਦੂਏ ਪਾਸੇ ਨਾਲ ਦੋ ਢੜੇ ਨਾ ਆ ਇੱਕੋ ਢੜਾ ਇਕ ਪਾਸਾ ਇਹ ਹੁਦਾ ਇਸ ਕੋ ਸਾਈਡ ਵੱਜ ਗਿਆ ਦੀ ਠੀਕ ਹੈ ਜੀ ਮਹੱਲਾ ਪਹਿਲਾ ਸਾਗਰ ਗੁਣੀ ਅਥਾ ਕਿਨ ਹਾਥਾਲਾ ਦੇਖੀਏ ਵੱਡਾ ਵੇ ਪ੍ਰਵਾਹ ਸਤਗੁਰ ਮਿਲੇ ਤਾਂ ਪਾਰ ਪਵਾਂ ਸਾਗਰ ਗੁਣੀ ਅਥਾ ਗੁਣਾ ਦਾ ਸਾਗਰ ਅਥਾ ਹੈ ਜਿਹਦਾ ਹੈਰਾਈ ਦਾ ਕੋਈ ਥਾ ਵੀ ਪਾਸ ਅਗਿਆਈ ਆ ਗੇਨੇ ਦਾ ਥੱਲਾ ਨਹੀਂ ਦੇਖਿਆ ਕਹਿਰਾਈ ਨਹੀਂ ਨਾਪੀ ਖਾਣ ਨਹੀਂ ਪਾਇਆ ਖਾ ਨਹੀਂ ਪਾਇਆ ਪੰਜਾਬੇ ਪਰਵਾਹ ਮਿਲੇ ਤਾਂ ਪਰ ਪਵਨ ਪੰਜਾਬੇ ਪਰਵਾਹ 사ਤਗੁਰ ਜੀ ਪਾਰ ਹੋ ਜਾਈਦਾ ਕਹਿਰਾਈ ਦੀ ਸਾਨੂੰ ਲੋੜ ਨਹੀਂ ਕੀਤੀ ਹੈ ਦੀ ਲੋੜ ਬਦੀ ਹੈ ਬਾਹਰ ਹੋਣ ਦੀ ਲੋੜ ਕਹਿਨਾਈ ਜਾਨ ਦੀ ਬੋਲ ਲੋੜ ਦੀ ਜਿਹੜਾ ਗਾਇਦਾ ਉਹ ਸਮਝੋ ਦੀ ਪੁਰਪੁਰਾ ਇਹਦਾ ਸਤਿ ਆਰਤਨਾ ਤਾਂ ਸਤਿ ਆਈ ਰਹੀਦਾ ਉੱਪਰ ਆਜੀ ਮਨ ਜੇ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੁੱਖ ਪੰਜਿਆ ਪਰ ਇਹ ਦੁੱਖ ਬਦੁੱਖ ਭਰਿਆ ਆ ਕੀ ਹੈ ਦੁੱਖ ਔਰ ਸੁਖ ਬਦੁੱਖ ਸੁਖ ਦੁੱਖ ਦਾ ਉਲਟ ਬਦੁੱਖ ਹੈ ਠੀਕ ਹੈ ਜੀ ਸੁਖ ਸੁਖੇ ਪਰਿਆ ਹੈ ਸੰਸਾਰ ਹੋਰ ਕੁਝ ਨਹੀਂ ਹਾਜੀ ਨਾਮੇ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੁੱਖ ਸੱਚੇ ਨਾਮ ਤੋਂ ਬਿਨ ਕਿਸੇ ਦੀ ਭੁੱਖ ਲੱਥੀ ਹੋਦੀ ਨਾ ਇੱਥੇ ਭੁੱਖ ਹੀ ਮਰਗੇ ਦੀ ਭੁੱਖ ਨਹੀਂ ਦੂਰ ਹੋਈ ਇੱਥੇ ਧੁੱਕ ਧੁੱਕ ਹੀ ਘਰ ਆਇਆ ਆ ਲੋਕ ਤੋਂ ਬਿਨਾਂ ਇੱਥੇ ਥੜੀ ਥੜੀ ਭੁੱਖੀ ਭੁੱਖ ਲੱਤੀ ਬਾਰ ਬਾਰ ਤਾਈ ਜਾਵਣ ਜਿਨ੍ਹੇ ਅੰਦਰ ਭਾਲਿਆ ਗੁਰ ਸ਼ਬਦ ਜੋ ਇੱਛਾ ਨੂੰ ਸੋ ਪਾਉਂਦੇ ਹਰ ਨਾਮ ਧਿਆਵੇ ਜਿਨ੍ਹੇ ਅੰਦਰ ਭਾਲਿਆ ਜਿਹਨਾਂ ਦੇ ਅੰਦਰ ਧੋੜਿਆ ਗੁਰ ਸ਼ਬਦ ਸੁਹਾਵੇ ਉਹਨਾਂ ਨੂੰ ਸ਼ਬਦ ਮਿਲ ਗਿਆ ਅੰਦਰ ਸ਼ਬਦ ਹੈਗਾ ਗੁਰ ਸ਼ਬਦ ਹੈਗਾ ਉਹਨਾਂ ਨੇ ਅੰਦਰੋਂ ਨਾਮ ਮਿਲ ਗਿਆ ਤੁਰਤੀ ਬਾਣੀ ਮਿਲ ਗਈ ਅੰਦਰੋਂ ਉਹਨਾਂ ਦਾ ਸੰਪਰਕ ਸ਼ਬਦ ਨਾਲ ਹੋ ਸੁਰਤ ਦਾ ਸੋਹਾਵੇ ਤੋਂ ਕੀ ਭਾਵ ਹੈ? ਗੁਰ ਸ਼ਬਦ ਸੁਹਾਵ ਹੈ। ਸੁਖ ਦਾ ਇਹ ਸ਼ਬਦ ਸੋਹਾਵਾ ਸੁਹਾਵ ਲੱਗਣਾ। ਅੱਛਾ ਜੀ। ਇਹ ਜੋ ਸੁਖ ਮਿਲਦਾ ਇੱਛਾ ਸੋ ਹੋ ਜਾਂਦੀਆਂ ਤਾਂ ਹਰ ਲਾਭ ਦਾ ਧਿਆਨ ਜੋੜ ਕੇ ਰੱਖਦੇ ਨੇ। ਜਿਹਨਾਂ ਇਹ ਸੁਖ ਸ਼ਬਦ ਨਾਲ ਰਹਿੰਦੇ ਨੇ ਉਹਨਾਂ ਹੋ ਜਾਂਦੀਆਂ। ਹਾਂ ਜਿਸ ਨੂੰ ਕਿਰਪਾ ਕਰੇ ਕਿਸ ਗੁਣ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿੰਨ ਕਾ ਮਿੱਤ ਹੈ ਜਨਮ ਮਗ ਨ ਪਾਵੇ ਜਿੱਤ ਕਿਰਪਾ ਹੋ ਜੇ ਉਹ ਗਿਆਨ ਮਿਲ ਜਾਂਦਾ ਸੋ ਹਰ ਗੁਣ ਗਾਉਦਾ ਹਰ ਗੁਣ ਗਾਉਣ ਲੱਗ ਗਿਆਨ ਹੋ ਜਾਂਦਾ ਉਹਦੇ ਗੁਣ ਗਾਇਨ ਕਰ ਲੈਂਦਾ ਧਰਮ ਰਾਏ ਤਨ ਕਾ ਮੇਟ ਧਰਮ ਰਾਏ ਕਾ ਉਹਦਾ ਬਿੱਤਰ ਬਣ ਜਾਂਦਾ ਜਦੋਂ ਵੰਦਨਾ ਪਾਵਾ ਜਦ ਦੇ ਵਾਰਗੋ ਨੂੰ ਕੋਈ ਉਹ ਜਦ ਦੇ ਵਾਰਗ ਤੇ ਜੂਏ ਪਾਸੇ ਦੀ ਲੈ ਜਾਂਦਾ ਕੱਢ ਕੇ ਜਾਂ ਵਾਲਾ ਮਾਰ ਕੇ ਜੀ ਹਰ ਨਾਮ ਨਾਲ ਜੁੜੇ ਰਹਿਣ ਉਹ ਆਲਾ ਜਮਾ ਉਹ ਆਲਾ ਆਪਣੇ ਬਿੱਤੇ ਸੁਵਾ ਜਾਂਦੇ ਨੇ ਇਹ ਰਸਤਾ ਪਿਆਰਾ ਸਾਡਾ ਵਾਲਾ ਰਸਤਾ ਨਹੀਂ ਹੈ ਕਿ ਮਾਰਗ ਨਹੀਂ ਹੈ ਤੇ ਗੁਰਮਖਾਨਾ ਮਾਰਗ ਹੈ ਇਹ ਹਰ ਕਾ ਮਾਰਗ ਠੀਕ ਹੈ ਇੱਥੇ 14ਵੀਂ ਪੌੜੀ ਸਮਰਤੀ ਜੀ